ਮੈਂ ਜਾਣਿਆ ਬੜ ਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬਪੜਾ ਜਨਮ ਨਾ ਪੇੜੀ ਅੰਗ ਮੈਂ ਤਾਂ ਇਹ ਜਾਣਿਆ ਸੀ ਵੀ ਇਹ ਗੁਰਮੁਖਾ ਇਹ ਗੁਰਮੁਖਾ ਹੈ ਬਈ ਨੂੰ ਪਤਾ ਸੀ ਬਗਲਾ ਮੈਂ ਤਾਂ ਸਮਝ ਜਾਣਿਆ ਹੰਸ ਬੜਾ ਇਹ ਕਥਾ ਕਰੂਗਾ ਵਾਹ ਇਹ ਗੁਰਬਾਣੀ ਜਾਣਦਾ ਅੱਜ ਦੇ ਪਿੱਛੇ ਜਿਹੜਾ 50 ਸਾਲ ਲੰਮੇ ਨੇ ਉਹ ਤਾਂ ਆਹੀ ਗੱਲ ਹੋਈ ਹੈ ਕਥਾ ਹੀ ਆਫ ਹੋਈ ਹੈ ਸਾਰੀ ਜਿਹੜੀ ਸੰਗਤ ਨੇ ਸੰਕੀਤਾ ਜਿਹੜੀ ਸੰਗਤ ਨੇ ਮੰਨੇ ਉਹ ਬੰਗਲੇ ਸੀ ਪਛਾਣ ਲਈ ਉਹਨਾਂ ਨੇ ਹੰਸ ਮੰਨ ਹੰਸ ਮੰਨ ਕੇ ਉਹਨਾਂ ਦੀ ਸੰਗਤ ਕਰਨ ਲਈ ਨੇ ਮੰਨ ਲਏ ਹੰਸ ਕੱਲ ਸੰਗਤ ਜੇ ਉਹਨਾਂ ਨੂੰ ਅੱਜ ਪਤਾ ਲੱਗ ਜਵੇ ਜਿਵੇਂ ਲੱਗ ਗਿਆ ਤਾਂ ਨੇੜੇ ਵੀ ਨਹੀਂ ਜਾਂਦੇ ਉਹਨਾਂ ਦੇ ਜੇ ਮੈਂ ਜਾਣਾ ਬਗ ਬੱਪੜਾ ਜੇ ਵੀ ਲੈਣਾ ਉਹਦੇ ਉਹਦੀ ਗੱਲ ਕਹੀ ਹੋਈ ਨਾਲ ਸੰਪਰਕ ਨਹੀਂ ਸੀ ਕਰਨਾ ਸੁਰਤ ਨੇ ਧਿਆਨ ਨਹੀਂ ਸੀ ਕਰਨਾ ਉਹਦੀ ਗੱਲ ਨਾਲ ਧਿਆਨ ਦਾ ਹੀ ਸੰਕਤਾ ਜਿਹੜੀ ਗੱਲ ਦਾ ਧਿਆਨ ਆ ਗਿਆ ਸੰਕਤੋਂ ਕਿ ਜੇ ਧਿਆਨ ਦੀ ਗੱਲ ਹੀ ਸਤਿ ਮਰੀ ਹੋਣ